ਜੋ ਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਸੋ ਔਖਾ ਜਗ ਮੈਂ ਹੋਇਆ ਨਰਕ ਘੋਰ ਦੁਖ ਖੂ ਹੈ ਉੱਥੇ ਪਕੜ ਜੋ ਦਿੱਤਾ ਕਰੇ ਪੂਰੇ ਸਤਗੁਰ ਕੀ ਜਿਹੜਾ ਪੂਰੇ ਸਤਪੁਰ ਦੀ ਦਿੱਦ ਕਰੂਗਾ ਉਹ ਔਖਾ ਜਗ ਹੋਇਆ ਜੱਗ ਦੇ ਵਿੱਚ ਔਖਾ ਹੀ ਹੋਇਆ ਉਹ ਸੌਖਾ ਦੀ ਰਿਹਾ ਜਾਂਦਾ ਜੱਗ ਔਖਾ ਹੀ ਹੋਇਆ ਉਹ ਸੌਖਾ ਦੀ ਰਿਹਾ ਜਾਂਦਾ ਨਰਕ ਖੂ ਰਖੂ ਧੁੱਕ ਖੂ ਹੈ ਤੇ ਪਗੜ ਉਟੋਇਆ ਉਹ ਜਿਹੜਾ ਵਿਆਨਤਾ ਦੇ ਖੂ ਦੇ ਵਿੱਚ ਛੁੱਟ ਦਿੱਤਾ ਜਾਂਦਾ ਉਹ ਨਰਕ ਤੋਰਦਾ ਜਿਹੜਾ ਵਿਆਨਤਾ ਦਾ ਖੂ ਹੈ ਫੜ ਕੇ ਉੱਤੇ ਛੁੱਟ ਦਿੱਤਾ ਉੱਤੇ ਪਤਾ ਹੀ ਨਹੀਂ ਮੈਂ ਕੀ ਗਲਤ ਕਰ ਰਿਹਾ ਕੀ ਠੀਕ ਕਰ ਰਿਹਾ ਹੋਰ ਠੀਕ ਕਰ ਗਲਤ ਦੀ ਤਬੀਜ਼ੇ ਨਹੀਂ ਰਹਿੰਦੀ ਅੱਲਾ ਹੋ ਕੇ ਕਰਦਾ ਇਹੋ ਜੋ ਕੁਝ ਕਰਦਾ ਔਰ ਦੁਖੀ ਰਹਿੰਦਾ ਦਰਦਾ ਵੀ ਰਹਿੰਦਾ ਵੀ ਮੈਂ ਗੰਤ ਕਰ ਰਹੇ ਹਾਂ ਸੋ ਜੀ ਊਕ ਪੁਕਾਰ ਕੋ ਨਾ ਸੁਣੇ ਮੂਲ ਸਭ ਖੋਇਆ ਅੱਜ ਤੋਂ ਪਹਿਲਾਂ ਜਿਹੜੇ ਜਿਹੜੇ ਲੋਕ ਐਦਾਂ ਕਰਦੇ ਰਹੇ ਨੇ ਆ ਗੁਰੂ ਘਰ ਵੇਲੇ ਜੀ ਨੇ ਤੇ ਕੀਤਾ ਉਹਨਾਂ ਦੀ ਕਹਾਣੀ ਹੈ ਉਹ ਕਹਿੰਦੇ ਉਹਨਾਂ ਦੀ ਊਕ ਪੁਕਾਰ ਦੀ ਕੋਈ ਨਹੀਂ ਸੁਣੀ ਕਦੇ ਕਿਸੇ ਨੇ ਉਹ ਮਲਨ ਵੇਲੇ ਔਖੇ ਤੋਂ ਕੋਕ ਪਕਾਰ ਕਰਦੇ ਨੇ ਕੋਈ ਨਹੀਂ ਸੁਣਵਾਈ ਉਹਨਾਂ ਦੀ ਕਿਤੇ ਦਰਗਾਹ 'ਚ ਕੋਕ ਪੁਕਾਰ ਕੋਈ ਨਾ ਸੁਣਿਆ ਹੋਏ ਹੋਏ ਰੋਇਆ ਬੜਾ ਔਖਾ ਹੋਏ ਔਖਾ ਹੋਏ ਹਲਤ ਪਲਤ ਸਭ ਗਵਾਇਆ ਉਹਨਾਂ ਨੇ ਹਲਤ ਪਲਤ ਉੰਦੀ ਹਲਤ ਪਲਤ ਸਭ ਗਵਾਇਆ ਉਹਨਾਂ ਨੇ ਲੋਕ ਗਵਾ ਲੇ ਬੂਲ ਸਭ ਖੋਇਆ ਨਾ ਤਾਂ ਖੋੜੀ ਸੀ ਉਹ ਤੇ ਜਿਹੜਾ ਬੂੜ ਲੈ ਤੇ ਬੁੱਧੀ ਉਹਦਾ ਵੀ ਦੱਸ ਕਰ ਤੇ ਬੁੱਧੀ ਢੋਨੀ-ਮੋਨੀ ਲੈ ਤੇ ਕੋਈ ਬਾਹ ਨਾ ਬੂੜ ਸੰਦਾ ਬਲਦ ਕਰ ਨਿਤ ਭਲ ਕੇ ਇੱਕ ਪ੍ਰਭ ਜੋਇਆ ਹਰ ਵੇਖੈ ਸੁਣੈ ਨਿਤ ਸਭ ਕਿਛ ਤੇਲੀ ਸੰਦਾਂ ਬਲਦ ਉਹ ਤੇਲੀ ਦੇ ਬਲਦ ਵਗੂ ਸਮਝੋ ਤੇਲੀ ਦਾ ਬਲਦ ਹੈ ਉਹ ਕਲਿਤ ਸਮਝ ਰੋ ਨੇ ਫੇ ਜੋੜ ਲਿਆ ਉੜਦਾ ਹੀ ਸਰੀਰ ਨਾਲ ਚੱਲ ਹੋ ਰਿਹਾ ਉਹ ਤਾਂ ਕੰਬ ਲੈ ਲਿਆ ਉਹ ਆਪ ਤੇਲੀ ਦਾ ਬਲਦ ਹੈ ਉਹ ਕਹਿੰਦਾ ਮੈਂ ਰਾਜਾ ਉਹ ਕਹਿੰਦਾ ਮੈਂ ਹੱਸੰਗਣਾ ਹੈ ਤੇਲੀ ਦਾ ਬਣ ਦੋ ਤੇਲੀ ਦੇ ਹੁਕਮ ਨਾਲ ਚੰਨਾ ਬਣਦਾ ਆਪਣੇ ਖਵਾਂ ਦਾ ਚੱਲੇ ਨਹੀਂ ਸਕਦਾ ਹਰ ਦੇਖੇ ਸੁਣੇ ਦਿੱਤ ਸਭ ਵਿੱਚ ਕਿੱਦੂ ਕਿੱਛ ਕੁਝਾ ਨਾ ਹੋਇਆ ਜੋ ਕਰ ਰਿਹਾ ਸਭ ਕੁਝ ਦੇਖ ਕੇ ਰਿਹਾ ਹਰ ਤੋਂ ਗੁੱਝਾ ਕੀ ਹੈ ਜਿਹੜਾ ਉਹ ਕਰ ਰਿਹਾ ਕੁਝ ਵੀ ਆਸਾ ਨਹੀਂ ਉਹ ਕਰ ਰਿਹਾ ਉਹ ਹੋ ਰਿਹਾ ਜੋ ਹਰ ਤੋਂ ਗੁੱਝਾ ਹੋਵੇ ਹਰ ਤਾਂ ਦੇਖ ਰਿਹਾ ਜੋ ਕਰ ਰਹੇ ਹੈ ਹਰ ਤੋਂ ਤਾਂ ਗੁੱਝਾ ਵੀ ਨਹੀਂ ਕਰ ਰਹੇ ਆ ਇਹ ਵੀ ਉਹਨੂੰ ਪਤਾ ਹੈ ਇਸ ਕਰਕੇ ਵੀ ਉਹ ਬਹੁਤ ਅਫਰ ਦਰੋ ਤੇਰਾ ਹੋਇਆ ਜਦ ਭੈ ਭੀਤ ਹੈ ਕਿਦੋਂ ਕੁਝ ਗੁੱਝਾ ਤੋਂ ਟਿੱਟੂ ਪਰਮੇਸ਼ਰ ਆ ਤਾਂ ਉਦੋਂ ਤਾਂ ਕੁਝ ਜੋ ਹੋਇਆ ਉਹਦੇ ਉਹਦੇ ਉਹਦੇ ਹੁਕਮ ਨਾਲ ਹੋਇਆ ਉਹ ਤਾਂ ਬਿਨਾਂ ਵੀ ਨਹੀਂ ਹੋਇਆ ਤੈਨੂੰ ਕਰਵਾ ਲਿਆ ਆਪਾ ਪੋਦੇ ਉਹਦਾ ਟੈਸਟ ਸੀ ਜੇ ਤੂੰ ਕੈਦੂ ਪਾਪੀ ਬਣਾਤਾ ਉਹਦਾ ਤਾਂ ਟੈਸਟ ਲਿਆ ਦੁੱਖ ਵੀ ਦਿੱਤਾ ਹੈ ਜਿਸ ਨੂੰ ਉਹ ਗੁਰਮੁਖ ਨੂੰ ਗੁਰਮੁਖ ਦਾ ਟੈਸਟ ਲਿਆ ਸੰਸਾਰ ਨੂੰ ਦਿਖਾਇਆ ਵੀ ਹੁੰਦੇ ਨੇ ਨਰ ਹੁੰਦੇ ਨੇ ਅਕਾਲ ਮੂਰਤ ਹੁੰਦੇ ਨੇ ਜਿਉਂਦੇ ਹੁੰਦੇ ਨੇ ਉਹਨਾਂ ਦੇ ਗੁਣ ਪਰਦਰshit ਕੀਤੇ ਜੀ ਗੁਰਮਖ ਦੇਤਾ ਠੀਕ ਹੈ ਤੈਨੂੰ ਉਹਨਾਂ ਨੇ ਭਲੀ ਦਾ ਬੱਕਰਾ ਬਣਾ ਲਿਆ ਹੂੰ ਜਿਹੜਾ ਹਰ ਹੈ ਕਿਉਂਕਿ ਹਰ ਹਰੇਕ चीज ਵੇਖਦਾ ਸੁਣਦਾ ਹੈ ਔਰ ਮਿਲਾਪ ਅੱਗੇ ਪ੍ਰਭੂ ਨਾਲ ਹੈ ਤੇ ਇਸ ਤਰ੍ਹਾਂ ਫਿਰ ਸਾਰਾ ਪਰਮੇਸ਼ਰ ਨੂੰ ਪਤਾ ਹੈ ਵੀ ਆਪਾਂ ਰਹੇ ਹਾਂ ਆਪ ਵੀ ਪਤਾ ਦੋ ਉਲਟਾ ਕਰ ਰਹੇ ਜਾਣਦਾ ਹੋਇਆ ਵੀ ਉਲਟਾ ਕਰ ਰਿਹਾ ਜੈਸਾ ਬੀਜੇ ਸੋ ਲੁਣਾ ਜਿਹਾ ਪੁਰਬ ਕਿਨੇ जिस कृपा करे प्रभु अपनी तिस के चरण धोया जैसा बीज जै है कोई बीज दा चरण धोया पर है परमेश्वर दी चरण धोना सतगुरु दी जेडी गल हुंदी पीता ओदे हुं ਉਹਦਾ ਰਾਸ ਕੱਟ ਕੇ ਜੀਣਾ ਰਾਸ ਵਿਚੋੜਨਾ ਵਿਚੋਂ ਉਹਦਾ ਭੁੱਖਣ ਖਾਂਦਾ ਸਤਗੁਰ ਦੇ ਉਪਦੇਸ਼ ਤੋਂ ਭੁੱਖਾ ਲੈਂਦਾ ਉਹ ਨੂੰ ਸਤਗੁਰ ਦਾ ਉਪਦੇਸ਼ ਜਿਹੜਾ ਰੀਐਕਸ਼ਨ ਕਰਦਾ ਸਾਧ ਸੰਤਨ ਠੀਕ ਹੈ ਜੀ ਇੱਥੇ ਪ੍ਰਭ ਆਪਣੀ ਲਈ ਚੈਜ ਕਿਰਪਾ ਕਰੇ ਪ੍ਰਭ ਆਪਣੀ ਪ੍ਰਭ ਨੂੰ ਕਹਾਂਗੇ ਜੀ ਆਹ ਪ੍ਰਭ ਆਪਣੀ ਕਿਰਪਾ ਪਰਮੇਸ਼ਰ ਦੀ ਵੀ ਕਿਰਪਾ ਹੈ ਇਹਦੇ ਪ੍ਰਭ ਦੀ ਵੀ ਕਿਰਪਾ ਸਾਰੀ ਇਕੱਠੀ ਹੋਈ ਹੈ ਗੁਰ ਸਤਗੁਰ ਪਿੱਛੇ ਤਰ ਗਿਆ ਜੀਓ ਲੋਹਾ ਕਾਠ ਸੰਗੋਇਆ ਜਨ ਨਾਨਕ ਨਾਮ ਧਿਆਏ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਗੁਰ ਸਤਗੁਰ ਤਰ ਗਿਆ ਜਿਉ ਜੀਵਾ ਗੁਰ ਦੇ ਪਿੱਛੇ ਲੱਗੇ ਤਰਦਾ ਗੁਰ ਸਤਗੁਰ ਦੇ ਪਿੱਛੇ ਜਿਹੜਾ ਵੀ ਲੱਗਿਆ ਉਹ ਤਰ ਜਾਂਦਾ ਮਨ ਭੁੱਖ ਜਿਹੜਾ ਉਹ ਡੁੱਬ ਜਾਂਦਾ ਲੋਹਾ ਕਾਠ ਸੰਗੋਇਆ ਕਾਠ ਦੇ ਸੰਗਤ ਕਰਕੇ ਆਠ ਸਤਗੁਰ ਹੈ ਉਹਦੇ ਸੰਪਤ ਕਰਕੇ ਉਹਦੇ ਸੰਗ ਹੋਣ ਕਰਕੇ ਲੋਭ ਵੀ ਤਰ ਜਾਂਦਾ ਹੈ ਮਨ ਵੀ ਤਰ ਜਾਂਦਾ ਹੈ ਜੇ ਨਾਨਕ ਨਾਮ ਧਿਆਏ ਤੂੰ ਹਰ ਹਰਿ ਸੁਖ ਹੋਇਆ ਇਸ ਕਰਕੇ ਜੀਵ ਨੂੰ ਤਿਆ ਸਿੱਖ ਨੂੰ ਤਿਆ ਹਰ ਹਰਿ ਟੂਟਾ ਹਰ ਹਰਿ ਲੋਭ ਤਿਆ ਹਰਿ ਨਾਮ ਧਿਆਨ ਲਾਤੋ ਜਪ ਹਰ ਹਰ ਨੂੰ ਜਪ ਕੇ ਹਰ ਨਾਮ ਨੂੰ ਜਾਣ ਕੇ ਸੁਖ ਹੋਇਆ ਆਹ ਨਾਂ ਬੁੱਧਿਆ ਪਿਆ ਆਹ ਲੋਗ ਨੂੰ ਜਾਣੇ ਤਾਂ ਸੁਖ ਹੋਇਆ ਤੋ ਕੋਣ ਵਾਸਤੇ ਐਸਾ ਕਰਨਾ ਜੀ ਦੀਈ ਹੈ ਮਹੱਲਾ ਗੁਰਮੁਖ ਮਿਲਿਆ ਹਰ ਰਾਇ ਅੰਤਰ ਜੋਤ ਪ੍ਰਗਸੀਆ ਨਾਨਕ ਨਾਮ ਸਮਾਏ ਐਸੀਆਂ ਵਡਭਾਗੀਆਂ ਨੇ ਬੁੱਧਿਓ ਸੁਹਾਗਣੀਆਂ ਦੇ ਜਿਨਾ ਗੁਰਮੁਖ ਮਿਲੇ ਆ ਹਰ ਰਾਏ ਜਿਹਨੂੰ ਹਰ ਰਾਏ ਗੁਰਮੁਖ ਮਿਲੇ ਆ ਜਿਨਾ ਨੇ ਗੁਰਮੁਖ ਨੂੰ ਹਰ ਰਾਏ ਬੁੱਧੀ ਤੰਤਰ ਜੋਤ ਆ ਅੰਤਰ ਉਦੈ ਜੋਤ ਪ੍ਰਗਾਸ ਹੋ ਗਿਆ ਗਿਆਨ ਕਾ ਲੋਭ ਸੁਭਾਏ ਨਾ ਨੇ ਕਾਇਆ ਲੋਭ ਦੇ ਵਿੱਚ ਹੀ ਸਮਾ ਉਸ ਪ੍ਰਗਾਉ ਦੇ ਵਿੱਚ ਹੀ ਸਮਾ ਗਈ ਵਿੱਚੇ ਹੋ ਗਈ ਹੈ ਜੀ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢਾ ਖੋਤ ਸਰੀਰ ਇਹੀ ਤਾਂ ਇਹਦੇ ਨਾਲੇ ਧਰਮ ਕਮਾਉਣ ਇਹਦੇ ਵਿੱਚ ਜੋਤ ਹੈ ਨੁਸਤੇ ਜੀ ਜੋਤ ਹੈ ਰਤਨ ਵਿੱਚ ਲੁਕ ਰਹਿ ਕੋਈ ਗੁਰਮੁਖ ਸੇਵਕ ਕੱਢੇ ਖੋਤ ਇਹਦੇ ਵਿੱਚ ਬੜਾ ਬੜਾ ਰਤਨ ਜੁਹਾਰ ਦੇ ਦੱਬੇ ਹੋਏ ਛੁਪੇ ਹੋਏ ਕੋਈ ਗੁਰਮੁਖ ਲੱਭ ਖੋਤ ਕੇ ਖੋਦ ਕੇ ਇਹਨੂੰ ਇਹਨੂੰ ਅੰਦਰੋਂ ਖੋਦ-ਖੋਦ ਕੇ ਕਰਾਂ ਉਹ ਗੁਰਬਖ ਲੱਭ ਲੈਂਦਾ ਹੈ। ਜੇ ਟੋਲ ਨਹੀਂ ਕੋਈ ਗੁਰਬਖ। ਜੋਤ ਵਿੱਚੋਂ ਲੱਭਣਾ ਦਾ ਜੋ ਕੁਝ ਜੋਤ ਨਾ ਸਰੀਰ ਵਿੱਚ ਜੋਤ ਹੈ ਤੁਹਾਨੂੰ ਸਰੀਰ ਵਿੱਚ ਜੋਤ ਹੈ ਸਰੀਰ ਜੋਤ ਆ ਸਰੀਰ ਇੱਕੋ ਹੈ ਪਰ ਜੋ ਕੁਝ ਮਿਲ ਜੋਤ ਵਿੱਚੋਂ ਗੁਰ ਠੀਕ ਜੋਤ ਵਿੱਚ ਹੀ ਮਿਲਦੇ ਨੇ। ਇਹ ਗੱਲ ਸਭ ਆਤਮ ਰਾਮ ਪਛਾਣਿਆ ਤਾਂ ਇੱਕ एक ਇੱਕ ਓਤ ਪੋਤ ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਤ੍ਰਵਣ ਸਰੋਤ ਖਾਬ ਆਦਮ राम ਪਛਾੜੀ ਸਭ ਨੂੰ ਆਦਮ ਨਾਮ ਕਰਕੇ ਹੀ ਵਿਛੜ ਲਿਆ ਸਾਰੇ ਹੀ ਹੱਥ ਆਪਦੇ ਤਾਂ ਇੱਕ ਰਵਿਆ ਦੁਆ ਤਾਂ ਕੋਈ ਰਿਹਾ ਹੀ ਨਹੀਂ ਵੈਰੀ ਬਗਾਨਾ ਤਾਂ ਕੋਈ ਰਿਹਾ ਹੀ ਨਹੀਂ ਆਪਣਾ ਪਰਾਇਆ ਤਾਂ ਕੋਈ ਰਿਹਾ ਹੀ ਨਹੀਂ ਇੱਕ ਦੇਖਿਆ ਇੱਕ ਮਿਲਦੇ ਇਕੋ ਸੁਣ ਸਰਬਣੀ ਸਰੋਤ ਇੱਕੋ ਦੇਖਿਆ ਇੱਕੋ ਹੀ ਬਣਿਆ ਸਰੋਤ ਥੋੜੀ ਹੈ ਇੱਕੋ ਸ਼ਬਦ ਸੁਣਿਆ ਤੇ ਦੁਆ ਰਹਿ ਕੌਣ ਗਿਆ ਸੰਸਾਰ 'ਚ ਦੁਆ ਕੋਈ ਹੈ ਹੀ ਦਾ ਪਰਬਦਾ ਤੂੰ ਹੀ ਤਾਂ ਕੁਈ ਤਾਂ ਆਇਆ ਦੁਆਨੇ ਕੋਈ ਵੀ ਹੈ ਜੋ ਕੋਈ ਐਸਾ ਜੀ ਭਲੇ ਬੁਰੇ ਸਭ ਤੇਰੇ ਉਹ ਜਿਹਨਾਂ ਨੇ ਭਲਾ ਸੋਚ ਨਾਲੇ ਬੁਰਾ ਜੇ ਅੱਜ ਬੁਰੀ ਸੋਚ ਆ ਕੱਲੂ ਪੜੀ ਹੋ ਜੂਗੀ ਮਰਗੀ ਫਰਕ ਸਕਦੀ ਹੈ। ਠੀਕ ਹੈ ਜਦੋਂ ਆਤਮ ਰਾਮ ਪਛਾਣਿਆ ਉਤੋਂ ਫੇਰ ਸਾਰੀ ਖੇਡ ਸ਼ੁਰੂ ਹੋਈ ਹੈ ਜੀ। ਆਉਂ ਗਿਆ ਆ ਤਾਂ ਪਛਾਣਿਆ ਬਸ। ਉਤੋਂ ਬਦਲ ਗਈ ਸਾਰੀ ਕਹਾਣੀ ਬਦਲ ਗਈ ਫੇਰ ਪਤਾ ਲੱਗਿਆ ਵੀ ਇੱਕ ਹੀ ਹੈ ਜਿਹੜਾ ਉਹੀ ਰਵਿਆ ਹੋਇਆ ਸਭ ਵਿੱਚ ਸਭ ਵਿੱਚ ਇੱਕੋ ਹੀ ਆਵਾਜ਼ ਕਿੱਥੇ ਹੈ ਇੱਕ ਦੇਖਿਆ ਸਰੋਤ ਤੋਂ ਭਾਵ ਸ਼ਬਦ ਹੈ ਅੰਤਰਾत्मा ਦੀ ਆਵਾਜ਼ ਇੱਕੋ ਹੀ ਸਾਰਿਆਂ ਦੀ ਸਾਰਿਆਂ ਦੀ ਅੰਤਰਾत्मा ਦੀ ਆਵਾਜ਼ ਤਾਂ ਦੋ ਨਹੀਂ ਆਉਂਦੀ ਸਭ ਹੀ ਹੈ ਜਨ ਨਾਨਕ ਲਾਭ ਸਲਾਏ ਤੂੰ ਛੱਡ ਛੱਕੇ सेवा तेरी होत ओ तेरी सेवा सच्ची सच्ची हो जाना सच्चे पर परवान हो जवे तेरी सेवा तेरी सेवा कीती दरगाह ਦੇ ਵਿੱਚ सच्ची दरगाह परवान चढ़ जते ते ये नाम सलावण वाले सच्चे दी सेवा हो रही है बिल्कुल बिल्कुल ठीक है ਇਹਦਾ ਵੱਲ ਨਾਨਕ ਦੱਸ ਰਹੇ ਆਂ ਵੀ ਜਨ ਬਣ ਕੇ ਨਾਮ ਨੂੰ ਸਲਾਉਣਾ ਚਾਹੀਦਾ ਹੈ ਹਾਂ ਜਾਣ ਕੇ ਜਾਣ ਕੇ ਜਾਣ ਕੇ ਪਹਿਲਾਂ ਸਮਝ ਕੇ ਸਲਾਉਣਾ ਚਾਹੀਦਾ ਹੈ ਬਿਨਾਂ ਨਾ ਜਿਹੜੇ ਸਲਾਉਂਦੇ ਨੇ ਹੋਰ ਕਹੀ ਜਾਂਦੇ ਨੇ